ਆਪਕਿਤੇ ਆਪ ਸੁਲੜੇ ਹਾਰ ਆਪੇ ਇੱਕ ਆਪ ਵਿਸਥਾਰ ਹੋ ਜਿਹੜੀ ਡਾਕਟਰੀ ਹੈ ਉਹ ਕੀ ਹੈ ਛਿੱਟ ਕੇ ਡਾਕਟਰ ਵਿਦਾਊਟਰ ਦਾ ਕੰਮ ਕਰ ਰਿਹਾ ਹੈ ਬਰੀ ਸੁੱਲਿਆ ਨਾਲ ਹੋ ਰਹੀ ਹੈ ਇਹ ਸੁਣ ਕੇ ਦੂਰ ਹੋਣੀ ਹੈ ਬਿਮਾਰੀ ਦਵਾਈ ਨਹੀਂ ਹੋਦਾ اور ਕੋਈ ਜਲਦੀ ਦਵਾਈ ਕਥਨ ਕਥਨ ਦਵਾਈ ਹੈ ਕਥਨ ਜਿਹੜਾ ਕਥਨ ਦੇ ਵਿੱਚ ਗਿਆਨ ਹੈ ਸਮਝਣ ਦੇ ਵਿੱਚ ਔਰ ਮੰਨਣ 'ਚ ਇਲਾਜ ਹੈ ਜਿਹੜਾ ਸੁਣਦਾ ਉਹ ਵੀ ਉਹੀ ਹੈ ਆਪੇ ਆਦਮੀ ਹੋਈਆਂ ਬਿਮਾਰਾ ਨਾ ਹੋ ਸਲਾਹ ਹੋ ਰਿਹਾ ਡਾਕਟਰ ਆਪ ਕਥਾ ਹੈ ਆਪ ਸੁਣੇ ਸੁਣੇ ਬਿਮਾਰ ਵੀ ਆਪੇ ਹੀ ਹੁੰਦਾ ਆਦਮੀ ਬਿਮਾਰ ਹੈ ਆਦਮੀ ਇਲਾਜ ਕਰਨ ਵਾਲੇ ਨੇ ਕੀ ਟੀਕਾ ਲਾ ਰਿਹਾ ਹੈ ਇਹ ਟੀਕਾ ਲਾਉ ਰਿਹਾ ਹੈ ਜਿਹੜਾ ਸੋਣਿਆ ਹਾਰ ਉਹਦਾ ਟੀਕਾ ਲੱਗ ਰਿਹਾ ਹੈ ਜਿਹੜਾ ਕਠਨ ਕਰਦਾ ਉਹ ਟੀਕਾ ਲਾ ਰਿਹਾ ਆਪਾਂ ਕਹਿੰਦੇ ਭਲਾਣਾਂ ਨਾਲ ਤਾਂ ਠੀਕ ਆ ਇਹ ਉਹ ਸਿਖਾਤੀ ਸਿੱਖਿਆ ਦੇਤੀ ਠੀਕਾ ਹੀ ਹੁੰਦਾ ਜਾਂ ਤਾਂ ਟੀਕਾ ਲਾਉਣਾ ਹੀ ਹੈ ਆਹ ਕਿਤਾਬਾਂ ਨੂੰ ਟੀਕਾ ਤਾਂ ਹੀ ਕਹਿੰਦੇ ਨੇ ਕੋਈ ਵੀ ਟੀਕਾ ਹੀ ਲੱਗਦਾ ਹਾਂਜੀ ਆਪੇ ਇੱਕ ਆਪ ਵਿਸਾਰ ਆਪੇ ਦਾ ਵਿਸਾਰ ਇੱਕ ਵੀ ਆਪ ਹੈ ਜੇ ਪੂਰਨ ਬ੍ਰਹਮ ਜਾਂ ਵਿਸਾਰ ਹੁੰਦਾ ਇੱਕ ਤੋਂ ਦੋ ਹੋ ਜਾਂਦੇ ਨੇ ਦੋ ਤੇ ਫਿਰ ਵਿਸਾਰ ਹੋ ਜਾਂਦਾ ਜਿਹੜਾ ਦੂਆ ਹੈ ਮਨ ਉਹ ਫਿਰ ਦਪਿੰਦਾ ਬਹੁਤ ਚਿੱਤ ਵਿੱਚ ਇਕੱਠਾ ਰਹਿ ਜਾਂਦੀ ਆ ਆਪੇ ਇੱਕ ਜਦ ਜਦ ਬ੍ਰਹਮ ਤੋਂ પ્રમાય પ્રમોઘય બુજ બ્રહ્મ તો થલે આયા બન કરકે પેનતાય ચિત્ત કરકે ફેર કરતાય ચિત્ત કરકે એકતા બન કરકે ફેર કરતા આપે એક એક ઉપસાર આપેસાર ઓ બન કરકે જેડી પેનતા ઓ બેસાર હે ઓ 84 લાખ જોડ લી ચિત્ત કરકે એકતા ઓ એક હે ઉતરા થાંડી અવાજ હે જેડી ઓ પોળી ચઢા રહી હે તું જળ રહી હે ਕੋਨ ਜਾਣਦਾ ਹੈ ਦੂਆ ਢੜਾ ਰਹੇ ਬੋੜੀ ਹਾਂ ਜਤਿਸ ਭਾਵੇ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲੈ ਸਮਾਏ ਜਤਿਸ ਭਾਵੇ ਤਾਂ ਸ੍ਰਿਸ਼ਟੋ ਪਾਏ ਉਹਨਾਂ ਦਾ ਮਨ ਜਲਤ ਹੋਵੇ ਸਿੱਧੀ ਜਾਂਦਾ ਇਹਦਾ ਹੁੰਦੀ ਮਹਾਤਬ ਬਹੁਤ ਦੇਰ ਦਾ ਨੇ ਸੰਸਰ ਬਹੁਤ ਦੇਰ ਦਾ ਪਰ ਹਸਤਾ ਹੁਣ ਤੇ ਜਿਆਦਾ ਹੋ ਜਾਂਦਾ ਨਾ ਇਸ ਤੋਂ ਪਾਣੀ ਉੱਪਰ ਹੋ ਜਾਂਦਾ ਵੇਖਾਦੇ ਹੁਣ ਆ ਕਰ ਆ ਕਰੋ ਫਿਰ ਜੋਰ ਸ਼ੋਰ ਨਾਲ ਕੰਮ ਸ਼ੁਰੂ ਹੋ ਜਾਂਦਾ ਫਿਰ ਸ੍ਰਿਸ਼ਟੀ ਪਾਵੇ ਜਦੋਂ ਪਾਵੇ ਸ੍ਰਿਸ਼ਟੀ ਪਾਵੇ ਫਿਰ ਸ੍ਰਿਸ਼ਟੀ ਪਾ ਸਮਾਏ ਆਪਣੇ ਭਾਣੇ ਲੈ ਸਮਾਏ ਜਿਹਨੂੰ ਉਹਦਾ ਭਾਣਾ ਜਿਹੜਾ ਉਹਦੇ ਭਾਣੇ ਜਾ ਜਾਂਦਾ ਉਹਨੂੰ ਆਪਣੇ ਨਾਲ ਜੋੜ ਲੈਂਦੇ ਇਹਨਾਂ ਬੜੀ ਜਲਬੜੀ ਹੋਈ ਜਾਂਦਾ ਮਾਰ ਹੋਇਆ ਇਹ ਸ੍ਰਿਸ਼ਟੀ ਤੋਂ ਪਹਿਲਾਂ ਹੋਇਆ ਸ੍ਰੀਸ਼ੀ ਦਾ ਕਾਰਨ ਬਾਹਰ ਦੀ ਬੜੀ ਬਿਮਾਰੀ ਦਾ ਗੜਬੜ ਪਹਿਲਾਂ ਹੋਈ ਜੇ ਗੜਬੜ ਹੋ ਗਈ ਤਾਂ ਇਹਦਾ ਪੁੱਛਿਆ ਸੀ ਇੱਥੇ ਬਿਮਾਰ ਹੋਇਆ ਕਰਨਾ ਗੱਲ ਪੁੱਛਿਆ ਬਿਮਾਰ ਕਿਵੇਂ ਹੋਇਆ ਸ੍ਰੀਸ਼ੀ ਲੋੜ ਪਈ ਆਪਣੇ ਬਾਣੇ ਜਮਵਾਰ ਹੋਇਆ ਆਪਣੇ ਬਾਣੇ ਜੇ ਤੇਰਾ ਹੋਊਗਾ ਪੈਰ ਕੋੜਾ ਮਾਰਿਆ ਦਾਫਲਾ ਆਪਣੇ ਹੱਥ ਇੱਕ ਹੀ ਹੈ ਇੱਥੋਂ ਪੈਰ ਕੋੜਾ ਮਾਰਿਆ ਦਾਫਲਾ ਆਪਣੇ ਹੱਥ ਉੱਥੋਂ ਵੀ ਬੁਆਰ ਹੋਇਆ ਹੈ ਜਿੱਤਨੇ ਆਪਣੇ ਗੋਣ ਕਲੇ ਹਰ ਬਿਸਰ ਗਿਆ ਆਪਣਾ ਜਿਹੜਾ ਸੀ ਨਾ ਵੱਡਾ ਵੱਡੇ ਨਾਲੇ ਟਕਰਾਉਂਦੇ ਉਹਦੀ ਸੁਪਰੀਮ ਹੈ ਉਹ ਸੁਪਰੀਮ ਹੈ ਗੱਲ ਬਰਾਬਰੀ ਹੋ ਗਈ ਇਸ ਸਮਾਂ ਕਹਦੇ ਬਰਾਬਰੀ ਬਰਾਬਰੀ ਕਰ ਲਈ ਫਿਰ ਗੈਰ ਤਾਤਰ ਜੋਏ ਭੁਗਤਿਆ ਤੋਂ ਆਪਨ ਕੋ ਦਰਖਤ ਮੰਨੇ ਝੂਠ ਨੇ ਸੱਚ ਦੀ ਬਰਾਬਰੀ ਕਰਦੀ ਕੂੜੇ ਆਲੇ ਨੇ ਸੱਚਾਰੇ ਦੀ ਬਰਾਬਰੀ ਕਰਦੀ ਇੱਥੇ ਵੀ ਕੂੜਿਆਰੇ ਸੱਚਾਰੇ ਦੀ ਬਰਾਬਰੀ ਕਰਦੇ ਨੇ ਇਹ ਉੱਥੇ ਵੀ ਜਦੋਂ ਰਹਿਣਾ ਹੈ ਨਹੀਂ ਉੱਥੇ ਵੀ ਕਿਸੇ ਤਰ੍ਹਾਂ ਮੱਗਪੇ ਦੋ ਗਿਆ ਤੇਰਾਇਆ ਜਿਹੜਾ ਆਪਾਂ ਕਹਿੰਦੇ ਆ ਉਹ ਤੇਰਾਇਆ ਜਿਹਨੂੰ ਕਿਹਨਾਂ ਮੰਦੇ ਲਗਭਗ ਤੇ ਬੋਲਦਾ ਜਿਹੜਾ یہ تو خیال ہے لائنیں شروع ہوئیں گے کوئی جدی گل نہیں مندی غصہ कर گیا ہوں رد کر دی اس کی گل غصہ کر گیا بیچارہ نہیں ہے میری گل کی رد ہو گئی غصہ کر گیا تو غصہ دل کی گردنوں سے ہوئی ہے وہ جتا گردن باہر ਅਤਪੈ ਦੇਵਲੋਵ ਚ ਮਤ ਫੇਰ ਦੇਵਲੋਵ ਜਿਹਦਾ ਮਤ ਫੇਰ ਹੁੰਦਾ ਨਹੀਂ ਆਹ ਸਰੀਰ ਦੀ ਦਾ ਲੋੜ ਇਹ ਤਾਂ ਇਹ ਤਾਂ ਕੱਪੜਾ ਸਰੀਰ ਇਹ ਤਾਂ ਕੱਪੜਾ ਜੀ ਸੰਦਲ ਆਹ ਲੇ ਜੀ ਦਾ ਕੱਪੜਾ ਆਖੇ ਨਾਲ ਚਾਏ ਬਾਹਰ ਲਈ ਜੀ ਤਬ ਨਹੀਂ ਹੁੰਦਾ ਜੋ ਬੁੱਢੇ ਹੀ ਬੁਰਾ ਸਖਦਾ ਹੀ ਜਨਰੇਸ਼ਨ ਦੇਖਦੀ ਲੱਗੇ ਸਮਝ ਨਹੀਂ ਲੱਗੇ ਉਹ ਥੋੜੀ ਜੀ ਮੰਨਣੀ ਔਖੀ ਹੈ ਜੋ ਹੋਲਦੀ ਹੈ ਬਤਲਾ ਗੂਆ ਗੂਆ ਮਾਨਸਰਾਮ ਜਿਹੜਾ ਦਸਮਾਹ ਖੇਲੀ ਆਈ ਉਹ ਜਿੱਤਰਨਾਟ ਜਿਹੜੀ ਉਹ ਬਤਲਾ ਗੂ ਜਿਹੜੀ ਦਾ ਬਾ ਕਾਇਦਾ ਸ਼ਰੀਰ ਹੈ ਬਤਲਾ ਪੈ ਇਹ ਵੀ ਹੈ ਉੱਤੇ ਬਾਸ਼ਾ ਹੋਰ ਹੈ ਪਰ ਆਪਾਂ ਛੱਡੀ ਆਹ ਵਾਲੀ ਪਾਸਾ ਆਹ ਵਾਲੀ ਪਾਸਾ ਦੀ। ਛੋੜੀ ਬਿਲਕੁਲ ਉਹ ਤਾਂ ਗੱਲੇ ਹੋਰ ਬਸ ਦੱਸ ਨਹੀਂ ਸਕਦਾ ਕੀ ਆ। ਗੱਲ ਉਹ ਇਹ ਤਾਂ ਗੱਲੇ ਦੀਆਂ ਜਿਹੜੀਆਂ ਆਪਾਂ ਇੱਥੇ ਕਰਦੇ ਉਹ ਹੋ ਦੱਸ ਨਹੀਂ ਸਕਦਾ ਕੀ ਆ। ਉਹ ਕਈ ਜਦਾਇ ਗੱਲੇ ਦੀਆਂ ਉਹ ਤਾਂ ਗੱਲ ਹੋਰ ਆ। ਆਹ ਹੋਰ ਹੈ ਬੜਾ। ਇਹ ਗੱਲ ਹੋਰ ਆ। ਕਰਤਕ ਕਰਮ ਕੇ ਵਿੱਚ ਹਾਂ ਕਰਤਕ ਕਰਮ ਕੇ ਵਿੱਚ ਨਹੀਂ ਹੈ ਕਰਤ ਜਿਹੜਾ ਹੈਗਾ ਵਗਿਲੇਗਾ ਹਾਂ ਤੇਰੀ ਕਰਮ ਕਰਮ ਵਿੱਚ ਰਹੇ ਉਸ ਪਰੰਧ ਹੀ ਮੇਰੇ ਹਾਂ ਕਰਤਕਾਰ ਨੂੰ ਆਈ ਗਾ ਛੋੜਾ ਕਰਤਕਾਰ ਬਗਾਈ ਹੈ ਜੇ ਬੰਦੇ ਲੈਵਲ ਤੇ ਸੋਚ ਹੈ ਵਿਛੜ ਗਿਆ ਜੇ ਬੰਦੀ ਲੈਵਲ ਦੀ ਸੋਚ ਪਰ ਹੋ ਗਈ ਤਾਂ ਵਿਛੜ ਗਿਆ ਕ੍ਰਿਤੀ ਮੈਦਿਕ ਤੇ ਅੱਜ ਤੇੜਾ ਹਾਂ ਕ੍ਰਿਤੀ ਮੈਦਿਕ ਤੇ ਅੱਜ ਤੇੜਾ ਨਹੀਂ ਉਹ ਬ੍ਰਹਮ ਦਾ ਵਿਜੁੱਧ ਤੇੜਾ ਬੈ ਉਹ ਬ੍ਰਹਮ ਦਾ ਵਿਜੁੱਧ ਤੇੜਾ ਬੈ ਲਾਵੇ ਅੱਧੇ ਨਾਲ ਜੋੜਨਾ ਧੰਨ ਨਾਲ ਜੋੜਨਾ ਮਾਇਆ ਚ ਇਹ ਕਿੱਥੇ ਨਹੀਂ ਹੌਕਮ ਕਰਨਾ ਇਹ ਕਿੱਥੇ ਨਹੀਂ ਹੌਕਮ ਕਰਨਾ ਕਿਰਕ ਜਨੇ ਕਰਖਾ ਗਏ ਨਾ ਕਥਨ ਪੂਰੀ ਹੈ ਕਥਨ ਅਡਾਟ ਦੋ ਲਿਡੀਆਂ ਹੋ ਗਈਆਂ ਕਖਾ ਨਹੀਂ ਡੇਡਦਾ ਕਿਸੇ ਫਿਰ ਦੋਇ ਆਦਮ ਦਰ ਗਏ ਅਡਾਟ ਕਾਪੇ ਕੋਈ ਕੰਮ ਨੇ ਦੋਹਾਂ ਦੇ ਵੱਖਰੇ ਕੰਮ ਦੋਇ ਹੱਥਾਂ ਦੇ ਕੰਮ ਵੱਖਰੇ ਤੁਮਤੇ ਭਿੰਨ ਨਹੀਂ ਕਿਸੋ ਹੋਏ ਆਪਨ ਸੂਤ ਸਭ ਜਗਤ ਕੋਏ ਕਿਰਤ ਕਰਨ ਮਤਲਬ ਆ ਜੇ ਸੋਚਿਆ ਇਹ ਬਿਛੋੜੀ ਕਰਤ ਕਰਨਾ ਮਤਲਬ ਕੱਪੜਾ ਵੀ ਕੇ ਪਰ ਮਿਆਵਾ ਕੱਪੜਾਤਾ ਉਹ ਹੋਰਗਾ ਲਾ ਉਹ ਤਾਂ ਆਇਆ ਵੀ ਜਨਮ ਨਾਲ ਨੂੰ ਤਾਂ ਜਿਹੜਾ ਕਰ ਬੰਦ ਇਹ ਬਾਤ ਨਹੀਂ ਗੱਲ ਆ ਪਰ ਕਰਮੇ ਜੇ ਜੇ ਕਰਤਕਾਰ ਮੰਨਦਾ ਫਿਰ ਤਾਂ ਮੁਕਤ ਹੈ ਤੇ ਸਰੀਰ ਦਾ ਕੰਮ ਨੂੰ ਮੰਨਦਾ ਜਿਹੜਾ ਉਹਦੇ ਉਹਦੇ ਦੁਆਰਾ ਕੰਮ ਹੋ ਗਿਆ ਜਿਹੜਾ ਸਰੀਰ ਵਾਲੇ ਕਰਮ ਨੂੰ ਮੰਨਦਾ ਮੈਂ ਕੁਝ ਕਰ ਸਕਦਾ ਉਹ ਕਰਮ ਵਾਲੇ ਨੂੰ ਦੁਬਾਰਾ ਜਨਮ ਜਿਹੜਾ ਕਰਤਕਾਰ ਨੂੰ ਕਰਮ ਨੂੰ ਕਰ ਤਾਂ ਮੁਕਤ ਹੋ ਗਿਆ ਉਹ ਤਾਂ ਕਰ ਅਸਲ ਕਰਮ ਅਸਲ ਜਿਹੜਾ ਕੰਮ ਕਰਤ ਕਰਦਾ ਸਰੀਰ ਨਾਲ ਕੀਤਾ ਕਰਮ ਦਈ ਕਰੇ ਨਹੀਂ ਸਕਦਾ ਸੋਚ ਸਕਦਾ ਕੁਝ ਕਰ ਨਹੀਂ ਸਕਦਾ ਸੋਚਣ ਚ ਆਜ਼ਾਦ ਹੈ ਕਰਨ ਵਿੱਚ ਆਜ਼ਾਦ ਇਹ ਕਰਨ ਵਿੱਚ ਆਜ਼ਾਦ ਮੰਨ ਲਿਆ ਇਹਨਾਂ ਨੇ ਕਰਨ ਵਿੱਚ ਆਜ਼ਾਦ ਬਣ ਗਏ ਜਦ ਕਰਨ ਵਿੱਚ ਆਜ਼ਾਦ ਨਹੀਂ ਜੇ ਕਰਨ ਵਿੱਚ ਆਜ਼ਾਦ ਮੰਨ ਲਿਆ ਫਿਰ ਅਰਾਧ ਹੋ ਗਿਆ ਕੋਈ ਜੇ ਦੁਨਿਆਵੀ ਨੂੰ ਦੇ ਵਿੱਚ ਕਰਨ ਵਿੱਚ ਅਰਾਧ ਮੰਨਣਾ ਪੈਣਾ ਹੀ ਸੀ ਦੇਹ ਦੰਡਤ ਨੇ ਸਮਾਜ ਦੀ ਵਰਤੀ ਸਮਾਜ ਦੀ ਵਰਤੀ ਸਮਾਜ ਦੇ ਕਾਨੂੰਨ ਦੇ ਵਿੱਚ ਅਸੀਂ 범ਮੰਨ ਕਾਨੂੰਨ ਦੇ ਵਿੱਚ ਜਿਹੜਾ ਚੋਰੀ ਕਰਦੀ ਹੈ ਕਾਦੀ ਹੈ ਅਫਰਾਦ ਮੰਦਾਂਗੇ ਦਿਰਾਗਾਲਿਸ ਨਿਆਂ ਦੇ ਵਿੱਚ ਅਫਰਾਦ ਨਹੀਂ ਗੁਦਣੇ ਇੱਥੇ ਚੱਲਣਾ ਨਹੀਂ ਕੰਮ ਇਸ ਕਰਕੇ ਸੁਪਰਤੀਆ ਜਿਹੜਾ ਸ਼ਾਸਤਰ ਹੈ ਮਨ ਦੁਰੀਆਂ ਨੂੰ ਕਿਵੇਂ ਬੰਦ ਕੇ ਕੰਟਰੋਲ ਚ ਰੱਖਣ ਇਹ ਉਹ ਗੱਲ ਹੈ ਉਹ ਜਿਹੜਾ ਗੱਲ ਹੈ ਉਹ ਇਹ ਮਨਸੇ ਲੈਵਲ ਤੇ ਬਣਾਇਆ ਹੋਇਆ ਸ਼ਾਸਤਰ ਮਨ ਬੱਚੇ ਆਦਮੀ ਨੇ ਬਣਾਇਆ ਉਹ ਗੱਲ ਕੋਈ ਉੱਥੇ ਤਾਂ ਗਲਤੀ ਕਰਦਾ ਹੀ ਇਹ ਗਲਤੀ ਕਰਦੇ ਨੇ ਗਲਤੀ ਕਰਨ ਵਾਲਿਆਂ ਨੂੰ ਗਲਤੀ ਛਡਾਈ ਨਹੀਂ ਗਲਤੀ ਕਰਨ ਵਾਲਿਆਂ ਨੂੰ ਗਲਤੀ ਕਰਨ ਵਾਲੇ ਹੀ ਰਹਿੰਦੇ ਸਰ ਉਹ ਤਾਂ ਕੂਤ ਕਬਰ ਕਰਦੇ ਬਸ ਸਭ ਨੂੰ ਚਾਹਦਾ ਗਲਤੀ ਕਰਨ ਵਾਲਿਆਂ ਨੂੰ ਮਾੜੇ ਮੋਟਾ ਸਮਝਾਉਣਾ ਮਿਲ ਕੋਲ ਸਖੀਏ ਕਰੀਂ ਦੰਡਤ ਕਰਕੇ ਸਮਝਾਉਣਾ ਉਹ ਵੀ ਸਮਝਾਉਣਾ ਪਰ ਇਹਨਾਂ ਤੇ ਬਿਲਕੁਲ ਛਡਾਉਣਾ ਨਹੀਂ ਕਰੋਣਾ ਨਹੀਂ ਹੈ ਪੈ ਕਰ ਜਾਦਾ ਬਦਲ ਬਲੀ ਜਣਾ ਅਫਰਾਦ ਅਫਰਾਦ ਦਾ ਉਲੂਣ ਬਦੀ ਕਰਨ ਅਫਰਾਦ ਨਹੀਂ ਕਰਨ ਦਾ ਅਫਰਾਦ ਦਾ ਅਨਮੂਲਨ ਨਹੀਂ ਕਰ ਰਿਹਾ ਜਿਹੜਾ ਸੰਸਾਰ ਜੋ ਸੰਸਾਰੀ ਆਦਮੀ ਨਰਾਜੇ ਤੇ ਉਹਨਾਂ ਤੇ ਰਾਜ ਕਰਦਾ ਅਫਰਾਦਿਆਂ ਤੇ ਰਾਜ ਕੀਤਾ ਜਾ ਸਕਦਾ ਤੇ ਅਫਰਾਦਿਆਂ ਉੱਤੇ ਰਾਜੇ ਜੀ ਕੀਤਾ ਜਾ ਸਕਦਾ ਇਸ ਕਰਕੇ ਰਾਜਾ ਜੇ ਅਪਰਾਧੀ ਨਹੀਂ ਰਹੇ ਨਾ ਰਾਜ ਨੂੰ ਰਾਜੇ ਨਹੀਂ ਹੁੰਦਾ ਇਸ ਕਰਕੇ ਰਾਜਾ ਉਹ ਰਸਤੇ ਦੀ ਤਰ੍ਹਾਂ ਉਹਦੀ ਮਜਬੂਰੀ ਹੈ ਕਿ ਬਿਲਕੁਲ ਅਪਰਾਧੀ ਕੋਈ ਨਹੀਂ ਦੋ ਤਾਂ ਰਾਜਾ ਵੀ ਅਪਰਾਧੀ ਹੈ ਇੱਥੇ ਦਾ ਰਾਜਾ ਇੱਥੇ ਦੇ ਅਫਸਰ ਰਾਜਪ੍ਰੋਤ ਰਾਜੇਸ਼ੀ ਗੱਦਮੁੱਤੇ ਸਾਰੇ ਅਪਰਾਧੀ ਨੇ ਰਾਜੇ ਸਤੋ ਜਿਹੜੇ ਗੁਗਦਮ ਨੇ ਜਿਆਦਾ ਪ੍ਰਤੀ ਪਰ ਉਹ ਕਹਿੰਨਾ ਹੈ ਸਮਰਾਟ ਕੋ ਨਹੀਂ ਦੋਸਤ ਉਹਨਾਂ ਨੇ ਆਪਣਾ ਕਾਨੂੰਨ ਬਣਾ ਲਿਆ ਤਗੜੇ ਵਾਸਤੇ ਕੋਈ ਕਾਨੂੰਨ ਦੀ ਬਾੜੇ ਵਾਸਤੇ ਕਾਨੂੰਨ ਹਮੇਸ਼ਾ ਹੀ ਰਿਹਾ ਸਿਆਸਤ ਤੋਂ ਲੈ ਕੇ ਉਹ ਕਹਿੰਦਾ ਸਮਰਾਟ ਕੋ ਨਹੀਂ ਦੋਸਤ ਕੋ ਸਾਂ ਉਹਨਾਂ ਨੇ ਤਾਂ ਵੈਸੇ ਹੀ ਧਰਮ ਦੇ ਵਿੱਚ ਬਣਾ ਤਾ ਤਗੜੇ ਵਾਸਤੇ ਕੋਈ ਕਾਨੂੰਨ ਨਹੀਂ ਆਜਿੰਨ ਵਰ ਨਾ ਪਾਪ ਹੈ ਕਿੰਨੀ ਵਾਰ ਤੇ ਕੋਈ ਪਾਪ ਨਹੀਂ ਸਿਮਰਤ ਕਰੋ ਉਹਦੀ ਪੂਜਾ ਕਰੋ ਉਹ ਚਾਹੇ ਸਾਰਿਆਂ ਨੂੰ ਮਾਰ ਦੇਵੇ ਇਹ ਡਿਫੈਕਟ ਹੈ ਸਿਮਰਤ ਕਰ ਸਾਡੇ ਗੱਲ ਵੀ ਇਹਦਾ ਕਾਨੂੰਨ ਚੋਂ ਕਹਿੰਦੇ ਨੇ ਕਾਨੂੰਨ ਚੋਂ ਕਹਿੰਦੇ ਨੇ ਪਕੜੇ ਵਾਸਤੇ ਕੁਝ ਕਰਦੇ ਮਾਰੇ ਵਾਸਤੇ ਰੋਜੀ ਜਾਸਿਸ ਭਾਵੇਂ ਦਾ ਸ੍ਰਿਸ਼ਟ ਉਪਾਏ ਆਪਣੇ ਭਾਣੇ ਲੈ ਸਮਾਈ ਜਾਸਿਸ ਭਾਵੇਂ ਦਾ ਸ੍ਰਿਸ਼ਟ ਉਪਾਏ ਇਹ ਜਾਸਾਰੇ ਨੂੰ ਭੋਤ ਦਾ 300 ਰੁਪਏ ਦਾ ਲੱਗਦਾ ਅਗਰ ਜੇ ਸਾਧਕਾਂ ਸਾਰੇ ਨੂੰ ਭੋਤ ਤਾਂ ਸਿੱਧਾ ਪੈਦਾ ਹੁੰਦੀ ਹੈ ਐਵੇਂ ਨਹੀਂ ਹੁੰਦੀ ਸਾਰੇ ਰਲ ਜਿਹੜੇ ਸਾਧਕਾਂ ਦੇ ਵਿੱਚ ਨੇ ਉਹ ਵੀ ਜਿਹੜੇ ਇੱਥੇ ਨੇ ਉਹ ਵੀ ਸਾਰਿਆਂ ਦੀ ਰਹਿਣਾ ਨੇ ਸਿੱਧੀ ਪੈਦਾ ਹੁੰਦੀ ਜਦ ਆਟੋਂ ਤੇ ਨੇ ਅਜ ਨਹੀਂ ਹੁੰਦਾ ਕਰਾਨੇ ਵਿੱਚ ਰਾਜੇ ਨਾਲ ਨਹੀਂ ਅਟੋਦੇ ਅਵੇシャレ ਟੁਕੜੇ ਹੋਏ ਨੇ ਬਰਨ ਰਾਜਗੀ ਪੈਦਾ ਹੋਈ ਫਿਰ ਕਦੇ ਜਾਲ ਭਾਈਆ ਡੋਡੋ ਹੋ ਜੋ ਸੰਸਾਰ ਦੇ ਵਿੱਚ ਨਾਰਾਜ ਨਾਰਾਜਗੀ ਨਾਲ ਗਾਦਾ ਨਾਰਾਜਗੀ ਨਾਲ ਕਹਿੰਦੇ ਨੇ ਪਰ ਉੱਥੇ ਨਾਰਾਜਗੀ ਦੀ ਲੋੜ ਨਹੀਂ ਸੀ ਇਹਨਾਂ ਨੂੰ ਅਟਕਾਤਾ ਹਿੱਸਾ ਉਹਨਾਂ ਨੂੰ ਦੇ ਦਿੱਤਾ ਇਹਨਾਂ ਦੀਆਂ ਲੋੜਾਂ ਇਹਨਾਂ ਨੂੰ ਦੇਤੀਆਂ ਜਿਹੜਾ ਜਿਹੜਾ ਜਾਇਦੇ ਮਾਹੌਲ ਤੇ ਰਹਿਣਾ ਚਾਹੁੰਦੇ ਹੋ ਇਹ ਮਾਹੌਲ ਦੇ ਤਾ ਇਹ ਸੰਸਾਰ ਦੇ ਜੀਵ ਉੱਥੇ ਜਾ ਸਕਦੇ ਨੇ ਉੱਥੇ ਤੇ ਇੱਥੇ ਆ ਸਕਦੇ ਨੇ ਆਪਣੀ ਇਛਾ ਨਾਲ ਆਪਣੀ ਇਛਾ ਨਾਲ ਜਿਹਨੇ ਉਥੋਂ ਸਾਧਨ ਟੁੱਟਣਾ ਹਰ ਵਿਸਵ ਨੂੰ ਖੁਆਰੀ ਤੇ ਕਹਿੰਦੇ ਹੋਇਆ ਥਿਆਜ ਸੁਲਕਣਾ ਹਰ ਵਿਸਰਤ ਜਿਥਾ ਚਾਹਣੋ ਸਾਚੇ ਖਾਂਦੇ ਹੋ ਕੇ ਸਾਨੂੰ ਇਹਦੇ ਡੇਣਾ ਦੇਖੋ ਮੈਂ ਜਨਮ ਲੈ ਸਕਦਾ ਤੇ ਲੈ ਸਕਦਾ ਜਨਮ ਆਪਣੀ ਮਰਜ਼ੀ ਨਾਲ ਲੈ ਸਕਦਾ ਬਾਉਂਡਰੀ ਹੈ ਜਨ ਬੁਨਾਂ ਕੋਈ ਬਾਉਂਡਰੀ ਨਹੀਂ ਕਰ ਸਕਦਾ ਖਾਂ ਨਹੀਂ ਕਹਿੰਦਾ ਵੀ ਜਨਮ ਜੋੜ ਲਵੇ ਲੈਣਾ ਚਾਹੇ ਲੈ ਲੜਾਈ ਉਹਦੀ ਹੋਵੇ ਲੱਗੀ ਹੋਵੇ ਤੇ ਪਰ ਅਟਾਟ ਅਫਸਰ ਹੋਵੇ ਉਹ ਕਹਿੰਦਾ ਮੈਂ ਜੰਮੇ ਜਾਣਾ ਤੁਮ ਉਹ ਪੁਆਣੀ ਸਾਹਿਬੀ ਲੜਾਈ ਤੇ ਘਰ ਵਾਈ ਸੀ ਉਹ ਕਹਿੰਦਾ ਮੈਂ ਲੜਾਈ ਦਾ ਤੁਮ ਉਹ ਕਹਿੰਦਾ ਵਿਦੈ ਤੇ ਰਕਮ ਲੜਨਾਂ ਅਸਪਾਸਾ ਕਰ ਇੱਥੇ ਆ ਕੰਮ ਕਲਾਕਾਰ ਬੰਦੇ ਨਾਲ ਲੜਾਈ ਜਿਹੜੇ ਲੜਾਈ ਵਾਸਤੇ ਤਿਆਰ ਹੁੰਦੇ ਆ ਅਛਾ ਤੇ ਜਾਣਦੇ ਹੁਣ ਉਹ ਕਹਿੰਦਾ ਮੈਂ ਸਭ ਦੇਖ ਲਿਆ ਦੇਖ ਲਾਂ ਘੰਟਾ ਹੋ ਗਿਆ ਉਹਨੂੰ ਦੇਖਦੇ ਲੜਾਈ ਮੈਂ ਸਾਰੀ ਜ਼ਿੰਦਗੀ ਕੰਨ ਤੇ ਤੁਰਵਾ ਲੇ ਜੋ ਫੜ ਨਹੀਂ ਉੱਠੀ ਕਹਿੰਦਾ ਮੈਂ ਫੜ ਨਹੀਂ ਖੁਰਜਣਾਂ ਨਾਲ ਖੜਿਆ ਮੈਂ ਸਾਰੀ ਜ਼ਿੰਦਗੀ ਖੁਰਜਣਾਂ ਨਾਲ ਲੜਿਆ ਉਹ ਖੁਰਜਣਾਂ ਨਾਲ ਲੜਿਆ ਕਦੇ ਮੈਨੂੰ ਖੁਰਜਣਾਂ ਚ ਲੜਨਾ ਆਉਂਦਾ ਐ ਭੜਿਆ ਮੈਂ ਸਾਰੀ ਖੁਰਜਣਾਂ ਨੂੰ ਹੱਥਾਂ ਲਗਾ ਦੀ ਲੱਕੜ ਦਾ ਉਹ ਬੇ ਦੋਹਾ ਕਾਣੋ ਨਾਲ ਖੁਰਜਲਾ ਆਇਆ ਉਹਦੇ ਇੱਛਾ ਸੀ ਨਾ ਜਾਂਦੇ ਜਾਣ ਦੀ ਲਈ ਰੋਕਿਆ ਉਹਦੇ ਕਰਪਾਹ ਦਾ ਇੱਛਾ ਉਹ ਨੂੰ ਰੋਕਿਆ ਨਹੀਂ ਤੂੰ ਨਹੀਂ ਜਾ ਸਕਦਾ ਕਹਿੰਦਾ ਮੇਰੀ ਇੱਛਾ ਹੈ ਜਾ ਵੀ ਰੋਕਿਆ ਵੀ ਤੂੰ ਨਾ ਜਾ ਤੂੰ ਬੌਮ ਨਹੀਂ ਜਾਣਦੇ ਜੰਗ ਵਿੱਚ ਜਾਣਾ ਜਿੱਤਰਾ ਹਾਰ ਕੇ ਸਦੀ ਹੋਵੇ ਤੇ ਕੋਈ ਇਹ ਨਹੀਂ ਇਲਜ਼ਾਮ ਕਿ ਤੂੰ ਦੇਖਦਾ ਰਿਹਾ ਵੀ ਦੁਈ ਆਪਣੀ ਫੌਜ ਹਾਰ ਗਿਆ ਹੈ ਹੋਗੀ ਤੂੰ ਵੀ ਅਰਦਾਸ ਹੀ ਤੇ ਖੜਾ ਤੇਰੇ ਤੇ ਇਸ ਜੰਦ ਦਾ ਕੋਈ ਰੱਬ ਨਹੀਂ ਹੈ ਤੂੰ ਖੜਾ ਹੋ ਜੀ ਉਹ ਵੀ ਆਪਣਾ ਕੇ ਇਸ ਕਰਕੇ ਜੇ ਕੋਈ ਆਉਣਾ ਚਾਹੁੰਦਾ ਹੋਵੇ ਇੱਥੇ ਲੜਾਈ ਹੈ ਸੱਚਖੰਦੀ ਸਾਧ ਸੰਗਤ ਦੇ ਖਿਲਾਫ ਲੜਾਈ ਹੈ ਦੁਨੀਆ ਦੀ ਕਸਮ ਪਾਕਾ ਜੋ ਉਥੇ ਭੇਜੇ ਨੇ ਇੱਥੇ ਆਣ ਦੇ ਖਿਲਾਫ ਭੇਜੇ ਨੇ ਉਹ ਖਲਾਫ ਜੰਗ ਹੋਈ ਜੰਗ ਦੀ ਪੈ ਕੇ ਨਾ ਇਹ ਇਹਦੇ ਲੜਾਈ ਹੋਈ ਸੱਜ ਦੇ ਖਲਾਫ ਹੈ ਲੋਕਾਂ ਦੀ ਕੂੜਿਆ ਰਿਆਂ ਦੀ ਇਹ ਗੱਲ ਦਾ ਨਹੀਂ ਪ੍ਰਚਾਰ ਕਰ ਰਹੇ ਲੋਕ ਸਾਰੀ ਲੜਾਈ ਉਸ ਦੇ ਖਲਾਫ ਹੋ ਰਹੀ ਹੈ ਦੱਸੋ ਕਹਿੰਦੇ ਦਰੁਣ ਖਲਾਫ ਹੋ ਰਹੇ ਨੇ ਕਿਹੜਾ ਨਹੀਂ ਖਲਾਫ ਕਹੇ ਕੌਣ ਕੌਣ ਕਹੇ ਉਹ ਨੂੰ ਮੰਨਦੇ ਨੇ ਉਹਦਾ ਹੀ ਖਲਾਫ डुप्लीकेट बनाई बैठे हैं अब अपने बड़े देखो नानक भी आज में ना गुरुद्वारे में फर्द लेना है ना हां चले की सबूता दूनान का ला ओला क्या कोई आईडी ग्रुप आईडी ग्रुप लगा क्या थे बहुत छात्र लोग ने सतपाशा ने ਕਿਹਾ ਇੱਥੇ ਅੱਗੇ ਮੈਂ ਜਾਨੂ ਕਿਵੂ ਤਾਂ ਨਹੀਂ ਕਿੱਟੂ ਲਿਆ ਜਦੋਂ ਤਹਾ ਉਹ ਕਿ ਮੈਂ ਜਾਨੂ ਜੂਲੇ ਦੋ ਸੇ ਸਮਾਨ ਤੋਂ ਮੌਲ ਪਰਣ ਸਤਿ ਨਾਮੁ ਗੁਰੂ ਜੋ ਚਾਹੁੰਨ ਸੰਘਾਰ ਕਰਨਾ ਸੰਤਾ ਨੂੰ ਆਵਾਜ਼ ਕਰ ਦੋ ਆਵਾਜ਼ ਦੋ ਸੰਤਾ ਨੂੰ ਉਤਾਰਿਆਣਾ ਸੱਚ ਨੂੰ ਉਤਾਰਿਆਣਾ ਜਿਹੜੇ ਦੁਸ਼ਟ ਨੇ ਦਿੱਤਕ ਦੁਸ਼ਟ ਸਾਾਕਤ ਦਿੱਤਕ ਜਿਹੜੇ ਦੁਸ਼ਟ ਨੇ ਇਹਨਾਂ ਨੂੰ ਡੌੜ ਕਰਨਾ ਜਿਹੜੇ ਸੱਚ ਦੀ ਲੜਾਈ ਲੜਦੇ ਉਹਨੂੰ ਉਤਾਰ ਦੋ ਉਹਨਾਂ ਦੀ ਯਾਦਗਾਰ ਕਰ ਉਹਨਾਂ ਦੀ ਉਹਨਾਂ ਦੀ ਗੱਲ ਜਾਣ ਪਾਉਣੀ ਤਾਂ ਉਹ ਤੋਂ ਬਾਅਦ ਉਹ ਸੱਚ ਦੀ ਲੜਾਈ ਲੜਨ ਆਉਂਦੇ ਨੇ ਮੁੱਲ ਭਾਏ ਤੇ ਸਰਾਂਦੇ ਵੀ ਇਹਨਨ ਕੜਦੋ ਜਨਰੇਸ਼ਨ ਨੂੰ ਜਿਹੜੀ ਪੈਦਾ ਹੋ ਗਈ ਜਿਹੜੀ ਜਦ ਕੜਦੋ ਸਾਡੀ ਜਦ ਪੱਟਣਾ ਇਹ ਤੇ ਇਹਨਾਂ ਦੀ ਜਦ ਪੜਦੇ ਹੋ ਸੰਤੋ ਵਾਰਣ ਦੁਸ਼ਟ ਸਿਧਾਰਣ ਨਾ ਸੰਤੋ ਵਾਰਣ ਦੁਸ਼ਟ ਸ਼ਬਦ ਕੋ ਬੂਲੋ ਪਰ ਕਿਆ ਇਹ ਕਾਜ ਧਰਾ ਹਮ ਜਗਤ ਨੂੰ ਇਸ ਕਬਾਰੇ ਤੇ ਛੋਟੇ ਲਈ ਹੋ ਸਾਦੂ ਸਭ ਆ ਗੱਲ ਸੀ ਕਿ ਜਨਮ ਧੜੇ ਚੜ ਕੇ ਹੋਇਆ ਜਾਂ ਹੁਣ ਚਾਰੇ ਹੁਣ ਚਾਰੇ ਜੰਗ ਦੇ ਵਿੱਚ ਝੋਕ ਦੇਵੇ ਆਪਣੇ ਸਾਹਮਣੇ ਸਭ ਕੁਝ ਮੈਲ ਮਾੜੀਆਂ ਸਭ ਕਬ ਨਹੀਂ ਸੀਗਾ ਇਹ ਤਾਂ ਗੋਰਖ ਦੇ ਸਰ ਤੋਂ ਬਣਾਉਂਦੇ ਨੇ ਮੈਲ ਮਾੜੀਆਂ ਦੋ ਤਲੇ ਨੇ ਦੋਾਂ ਦੀ ਲੜਾਈ ਆ ਸੱਚੀ ਹੋਜੀ ਜਾਂ ਤੇਸ ਭਾਵੇਂ ਤਾਂ ਤੇਰੀ ਲੜਾਈ ਚੰਗੇ ਦੀ ਜਾਂ ਹੋਰ ਕੀ ਆ ਹੋਈ ਆ ਭਗਤਾ ਤੇ ਸੰਸਾਰੀਆਂ ਇਕੱਠੇ ਚੱਲੇ नहीं ਸਕਦੇ ਜੋੜ ਕੇ ਕਦੇ ਨਾ ਆਇਆ ਕਿਉਂਕਿ ਚੱਲਣ ਤੇ ਭਗਤੋ ਸੰਸਾਰੀ ਸੰਸਾਰੀਆਂ ਨਾਲ ਨਹੀਂ ਭਗਤ ਜੁਰ ਵਾਲੇ ਨਹੀਂ ਚੱਲ ਸਕਦੇ ਉਹਨੂੰ ਸਾਨੂੰ ਗੁਰੂ ਜੀ ਕਾ ਬਿਆਸ ਸੁਧਾ ਗਿਆ ਨਿਕਾਲਿਆ ਸੰਸਾਰੀ ਕੰਮ ਦੇ ਖਾਚ ਲੰਦ ਜੀ ਜਾਤਿਸ ਭਾਵੇ ਦਾ ਸਿਰਸਟੋ ਪਾਏ ਆਪਣੇ ਭਾਣੇ ਲੈ ਸੋਈ ਜਾਤਿਸ ਭਾਵੇ ਦਾ ਸਿਰਸਟੋ ਪਾਏ ਲੋਕੋਂ ਨੂੰ ਬੋਲਦੇ ਸੱਚਖੰਡਾਂ ਨੇ ਉਸੇ ਚ ਪੈਦਾ ਕਰ ਦਿੰਦਾ ਵਈ ਅਹਰ ਜਿਹੜੇ ਤਾਂ ਉਹ ਬਰੀਜ ਹਸਤਾਲ ਦਾ ਹੈ ਲਾਪ ਫੇ ਅਸੀਂ ਮਰਦੇ ਹਸਤਾਲ ਚਾਹੀਦਾ ਹਸਤਾਲ ਖੋਲਾ ਹੁੰਦਾ ਸਟਾਰ ਦਸ ਰਗਾ ਉਹ ਕਮਨਾਸ ਦਰ ਬਣਾਉਂਦੇ ਬਰੀਜ ਹਸਤਾਲ ਥੋੜੀ ਬਣਾ ਸਕਦੇ ਉਹਨਾਂ ਦੇ ਬਜਾਏ ਅੱਲੇ ਪੱਲੇ ਕੀ ਹੁੰਦਾ ਅੱਲੇ ਪੱਲੇ ਦੀ ਕੁਛ ਹੁੰਦਾ ਇਹਨਾਂ ਦੇ ਅੱਲੇ ਪੱਲੇ ਕੀ ਹੈ ਇਹ ਕਾਦਾ ਬਣਾਉਂਗੇ ਜਾਣਤਾ ਨਾ ਕੋਈ ਹੈ ਦੀ ਜਿਹੜਾ ਗਿਆਨ ਹਸਤਾਲ ਜਿਹੜੀ ਥੋੜੀ ਚਾਹੀਦੀ ਐ ਉਹਨੂੰ ਦੇਦੀ ਆ ਸਰਕਾਰੀ ਲੋਕਾਂ ਕੋਲ ਨਾਮ ਨਹੀਂ ਹੁੰਦਾ ਤੇ ਨਾਮ ਜਾਈਦਾ ਹਸਤਾ ਦੇ ਵਿੱਚ ਹੀ ਦਾ ਨਾਮ ਦਾ ਲੱਗਣਾ ਚਾਹੀਦਾ ਉਹ ਇਹ ਨਾ ਕੋ ਹੈ ਕੋਈ ਨਹੀਂ ਨਾਮਦਾਰੂ ਹੈ तो ਤੇ ਨਾਮਦਾਰੂ ਤਾਂ ਫਿਰ ਪਰਮੇਸ਼ਰ ਦੇ ਪਿੱਛੇ ਨਾਲੇ ਆਉ ਇੱਥੇ ਜਾਤਿਸ ਭਾਵੇ ਦਾ ਸ੍ਰਿਸ਼ਟ ਜਿਹੜੇ ਹਮਮੇ ਦੇ ਮਰੀਜ਼ ਨੇ ਉਹਨਾਂ ਦੇ ਇਲਾਜ ਵਾਸਤੇ ਆਏ ਆ ਹਮਮੇ ਦੇ ਦਵਾਈ ਲੈਣ ਆਏ ਆ ਅਸੀਂ ਪਰ ਦਵਾਈ ਦਵਾਈ ਪਰਮ ਕਰ ਗਈ ਹਮੇ ਦੇਖ ਲਿਆ ਸੀ ਉਹਨੇ ਕਰਕੇ ਨਿਕਲੇ ਕੁਝ ਨਹੀਂ ਪਰਮ ਸੀ ਸਾਨੂੰ ਬਰਾਬਰੀ ਕਰਨ ਦੀ ਸੱਚ ਨਾਲ ਬਾਅਦ ਬਾਅਦ ਦੇ ਕੇ ਬਾਰ ਬਾਰ ਮੂੰਹ ਦਿਖਾਦੀ ਉਹਦਾ ਫੇਰ ਨਹੀਂ ਹਾਂਜੀ ਜਾਤ ਆਪਣੇ ਬਾਣੇ ਲੈ ਸਮਾਏ ਜਦ ਜਿਹੜੇ ਮਰੀਜ਼ ਨੂੰ ਵੀ ਦਵਾਈ ਫਿੱਟ ਆ ਜਾਂਦੀ ਹੈ ਨਾ ਫਾਇਦ ਲੱਗਣ ਲੱਗ ਜਾਂਦਾ ਨਾਮ ਉਹ ਕਹਿੰਦਾ ਹੋਰ ਖਾਣ ਦੀ ਲੋੜ ਨਹੀਂ ਮੈਨੂੰ ਤਾਂ ਇਹ ਲਈ ਜਾਓ ਅਜਿ ਨੂੰ ਨਾਮ ਆ ਜਾਂਦਾ ਫਿੱਟ ਉਹਦੀ ਛੁੱਟੀ ਹੋ ਜਾਂਦੀ ਤੇ ਉਥੇ ਨਾਮ ਦੇ ਬਿਨਾ ਕੋਈ ਦਵਾਈ ਹੋਰ ਹੈ ਨਹੀਂ ਸਾਰਿਆਂ ਦੀ ਖਰਾਕ ਨਾਮ ਆ ਸੱਚ ਇੱਥੇ ਸਾਡੀ ਖਰਾਕ ਕੁਝ ਹੋਰ ਹੈ ਤੇ ਦੁਨੀਆਂ ਦੇ ਰਸ ਕਥਨ ਤੋਂ ਹੋ ਉਦਾ ਮਨ ਮੁੱਕਰ ਜਾਂਦਾ ਹੈ ਦੁਨੀਆ ਦੇ ਰਸ ਕਾ ਸਾਨੂੰ ਨਫਰਤ ਕਰਨ ਲੱਗ ਜਾਂਦਾ ਹੈ ਨਫਰਤ ਕਰਨ ਲੱਗਦਾ ਤਾਂ ਛੱਡਦਾ ਰੱਜ ਕਦੀ ਛੱਡਦਾ ਜਦ ਕਹਿੰਦਾ ਵੀ ਹੋਰ ਜਿਹੜੀ ਚੀਜ਼ ਖਾਣੀ ਕਹਿੰਦਾ ਨੌ ਨਾਲ ਕਿਤੇ ਜਗਾ ਨਹੀਂ ਹੈ ਉਲਟੇ ਅਜੂਗੇ ਨਾਲ ਆਇਆ ਤੇ ਜਦ ਕਿਸੇ ਚੀਜ਼ ਤੇ ਖਾਣ ਤੇ ਨੌ ਰਹੇ ਤੇ ਉਲਟੀ ਹੁੰਦੀ ਹੋਵੇ ਨਾ ਅੰਦਰੋਂ ਫੇਰ ਜ਼ਬਰਦਸਤ ਹੁੰਦੀ ਹੈ ਜਿਹੜੀ ਜਿੰਦਾਂ ਨਾਲ ਆ ਲਈਦਾ ਯੁਰਗੀਆ ਨਾ ਤਰਾਣੀ ਮਤੋ ਤੂੰ ਤੂੰ ਨਾ ਨਾ ਸੁਣਦਾ ਮੈਂ ਨਹੀਂ ਮੰਨਦਾ ਜਦ ਮਾਇਆ ਦਾ ਨਾ ਸੁਣਨਾ ਵੀ ਦੋ ਬੰਦੇ ਮਨ ਫੇਰ ਛੱਡਦਾ ਸੰਸਾਰ ਨੂੰ ਇਹ ਨਹੀਂ ਛੱਡਦਾ ਇਹ ਛੱਡ ਪਰੇ ਮਸਾਉਣ ਵਾਲੀ ਚੀਜ਼ ਹੈ ਹਾਂਜੀ ਨਹੀਂ ਕੁਝ ਹੋਏ ਆਪਨ ਸੂਰ ਸਭ ਜਗਤ ਪੁਰਾਣ ਆਉਂਦੀ ਕਿਉਂ ਹੈ ਦੇਖਣ ਵਾਸਤੇ ਪਹਿਲੇ ਹੀ ਪਾਤੀ ਇੱਕ ਖਣਾ ਖਦਾ ਕੋੜੇ ਨਹੀਂ ਘਣਾਉਂਦਾ ਛੱਡੀ ਹੋਈ ਐ ਇਸ ਕਰ ਨੇਟਾ ਪੱਲਾ ਪੱਲਾ ਭਰਤ ਬੇਦਾ ਵੀ ਜਸ ਖਣਾ ਆਇਆ ਸਾਰੀ ਦੇਖਾ ਪਹਿਲਾਂ ਖੜਾ ਹੋਵੇ ਪੱਲਾ ਪਰ ਆਵੇ ਵੀ ਖਣਾ ਆਇਆ ਬੀਜ ਜਾ ਜਸ ਬੀਜਾਊਗਾ ਤੇ ਦੇ ਆਪਾਂ ਜਿਹੜਾ ਯਾਰਾ ਤੁਸੀਂ ਜਿਸਨ ਕਿਸੇ ਨੌਕਰ ਨੂੰ ਇੱਥੇ ਜੀ ਬੀਜਿਆ ਤੇ ਰੱਖ ਲੂਗਾ ਇਹਦਾ ਹੱਥ ਰੱਖ ਲੈ ਜਿਹੜਾ ਯਾਰਾ ਦੀ ਗੱਲ ਕਰ ਇੱਕ ਮੋੜੀ ਵੇਚ ਲਾਂਗੇ ਛੱਡੋ ਪਰ ਜਿਹੜਾ ਮਾਲਕ ਨੂੰ ਬੰਦਾ ਚਾਰ ਪਾ ਦੋ ਪੰਜਵੀਂ ਵੇਚ ਲਾਂਗੇ ਜਿਹੜੇ ਯਾਰਾ ਦਾ ਪਰ ਉਹ ਕੋਈ ਇੰਸਾਰੇ ਵੇਚੂਗਾ ਜਾ ਕੇ ਇਸ ਕਰਕੇ ਇਹ ਨਹੀਂ ਦਿੰਦੇ ਕਿਸੇ ਨੂੰ ਨਾਮ ਨਹੀਂ ਮੰਨਦਾ ਕਿਸੇ ਨੂੰ ਇਤਬਾਰ ਦੇਣਾ ਇਹ ਹੀ ਹੈ ਹਾਂਜੀ ਤੇ ਤੇ ਪਿੰਕਾਂ ਕੋ ਤੁਮ ਤੇ ਪਿੰ ਨਹੀਂ ਕਿਸ ਹੋਏ ਆਪਨ ਸੂਰਬ ਜਗਤ ਘਰੋਏ ਤੇ ਤਵਣਾ ਉਹ ਬ੍ਰੰਤ ਬਣਾ ਕੋ ਚਿਰ ਕੀਤਾ ਜਾ ਬੋਸ ਨਹੀਂ ਇਹਨਾ ਨਾ ਹਜ਼ਾਰ ਬਣ ਸਕਦਾ ਨਾ ਦਲ ਚੱਲ ਸਕਦਾ ਚੱਲ ਵੀ ਨਹੀਂ ਸਕਦਾ ਨਾ ਬਣ ਸਕਦਾ ਨਾ ਚੱਲ ਨਾ ਐਸਸੀ ਦੀ ਜਿਹੜਾ ਜਿਹੜੀ ਅ ਜਿਹੜੇ ਮਸਲੇ ਵਾਸਤੇ ਸਿਸਟਮ ਪੈਦਾ ਕੀਤਾ ਨਾ ਮਸਲਾ ਹੱਲ ਹੋ ਸਕਦਾ ਇਸ ਤੇ ਪੜ ਨਹੀਂ ਕੱਚ ਕੀ ਬਦਲ ਹੋਏਗਾ ਕੀ ਹੋਏਗਾ ਸਿਸਟਮ ਨਹੀਂ ਪੈਦਾ ਹੋ ਸਕਦੀ ਬਿਮਾਰਾਂ ਦਾ ਇਲਾਜ ਨਹੀਂ ਹੋ ਸਕਦਾ ਹਸਟਾ ਨਹੀਂ ਪੈਦਾ ਕੀ ਇਹ ਵੀ ਬਿਨਾਂ ਕਰਦੇ ਤੰਦਰੁਸਤ ਕਰਦੇ ਨੇ ਸਰਕਾਰ ਕਰਦੀ ਹੈ ਡਾਕਟਰ ਵੀ ਉਹਨਾਂ ਤੰਦਰੁਸਤ ਜਿਹਾਉਣਗੇ ਪੜਾਈ ਵੀ ਤੰਦਰੁਸਤ ਕਰਦੇ ਡਾਕਟਰ ਵੀ ਉਹੀ ਵਲਡ ਜੋਨਾ ਜੇ ਵਲਡਗੇ ਉਹ ਚਾਰ ਕਰਨਗੇ ਤੁਮ ਤੇ ਭਿੰਨ ਨਹੀਂ ਕੁਝ ਹੋਏ ਆਪਨ ਸੂਖ ਸਭ ਜਗਤ ਪਰੋਏ ਇਸ ਕਰਕੇ ਆਪਨ ਸੂਖ ਸਭ ਜਗਤ ਪਰੋਏ ਸਾਰਾ ਜੱਗ ਜਿਹੜਾ ਹੈਗਾ ਹੁਕਮ ਦੇ ਸੂਤਰ ਵਿੱਚ ਹੈ ਹਕਮ ਰੂਪੀ ਵਿੱਚ ਉੱਤਰ ਦੇ ਬਿਚਾ ਹੁਕਮ ਦੇ ਬਿਨਾ ਕੁਝ ਦੇਦਾ ਕੌਮਾ ਲਫਜ਼ਾਇਆ ਅਦੇਖ ਹੈ ਫਿਰ ਇੱਕ ਫੇਰ ਤੇ ਆ ਗਿਆ ਦੇਖਦਾ ਦੇ ਵਿੱਚੋ ਇੱਕ ਤਾਂ ਹੁਕਮ ਹੁਕਮ ਤੇ ਆ ਗਈ ਸੀ ਹਾਂਜੀ ਜਾਂ ਤੋਂ ਜੀਓ ਆਪ ਬੁਝਾਏ ਸੱਚ ਨਾਲ ਸੋਈ ਜਨ ਪਾਏ ਜਾਂ ਕਹੋ ਜੀਓ ਆਪ ਬੁਝਾਏ ਇਹ ਮੁਝਣ ਵਾਲੀ ਗੱਲ ਸੀ ਸਾਰੀ ਜਿਹੜੀ ਇਹ ਗੁਕਤ ਗੱਲ ਹੈ ਸ੍ਰਿਸ਼ਟੀ ਕਰਨ ਦਾ ਤੈਦਾ ਹੋਈ ਜਦ ਉਸ ਬਾਅਦ ਤਾਂ ਸੇ ਸ਼ੋਭਾ ਆਇਆ। ਉਹ ਇਹ ਸਾਰੀ ਗੱਲ ਗੁਪਤ ਸੀ। ਬਹੁਤ ਹੀ ਗੈੜੀ ਗਲਤੀ ਗੁਜਰਣ ਵਾਲੀ ਸੀ ਸਾਹਿਬ। ਫਿਰ ਲਿਖਣੀ ਲਗੀ ਯਾ ਕੋ ਪ੍ਰਭ ਜੀਓ ਆਪੁ ਬੁਝਾਏ। ਸੱਚ ਨਾਮ ਸੋਈ ਜਨਮ। ਇਹ ਆ ਨਾਮ ਅਸਰ ਦੇ ਵਿੱਚ। ਸ੍ਰਿਸ਼ਟਿਕ ਵਿੱਚ ਪੈਦਾ ਹੋਇਆ ਕੋ ਪੈਦਾ ਹੋਈ। ਕਿਹਦੇ ਪੈਦਾ ਕੀਤੀ? ਆ ਜਵਾਬ ਦੇ। ਜਾ ਤੋ ਪ੍ਰਭ ਜੋ ਆਪੁ ਸੁਝਾਇ ਸਚ ਜਨ ਪਾਏ ਸਚ ਨਾਮ ਉਸੇ ਨੂੰ ਮਿਲਦਾ ਗਿਆਨ ਠੀਕ ਗਿਆਨ ਸਿਸ਼ਟੀ ਦੇ ਪੈਦਾ ਹੋਣ ਦਾ ਕਾਰਨ ਕਾਰਨ ਕਾਰਨ ਪ੍ਰਵੇਖਨ ਉਹਦੀ ਉਹ ਵਿਆਖਿਆ ਹੈ ਹੋਰ ਖੁਲਾਸਾ ਕੀਤਾ ਇਸ ਬ੍ਰਿਤੀ ਨਾਲ ਜਿਹਨੂੰ ਕਹ ਕਾਰਨ ਕਾਰਨ ਪ੍ਰਵੇਖ ਹੈ ਉਸਰਨਾ ਹੀ ਨ ਕੋਏ ਉਸੇ ਗੱਲ ਦਾ ਵਿਆਖਿਆ ਕੇ ਹੋਰ ਉਸੇ ਕਲ रोशनी पाई है। कुछ ਵਿਚਾਰੇ ਹੋਰ ਦੱਸ ਕੇ ਵਿਚਾਰੇ ਹੋਰ ਦੱਸਿਆ ਜਿਹੜਾ समझ ਇਹ ਸਮਝ ਆਈ ਜੀ ਕਿ ਜੋ ਉਹ ਤੋਂ ਬਾਅਦ ਦੱਸਿਆ ਉਹ ਦੀ ਰੋਸ਼ਨੀ ਜੇ ਸਮਝੋਗੇ ਉਹਨਾਂ ਕੋ ਦੱਸਣਾ ਪੈਣਾ ਦੀ ਤਾਂ ਇਹ ਗੱਲ ਆਈ ਇਸ ਇਹ ਉਹ ਜੜਾ ਜੜਾ ਬਜਲ ਇਹ ਸੱਚਾ ਹੈ ਉਹਨੂੰ ਹੈ ਇਸਾਈ ਹੈ ਮੁਸਲਮਾਨ ਬਿਮਾਰ ਬਿਮਾਰ ਰਹਿ ਤੱਕ ਜਾਇਆ ਹੋਇਆ ਉਹ ਸਮਝਦਾ ਆਪਣੇ ਆਪ ਨੂੰ ਇਸਾਈ ਉਹ ਸਮਝਦਾ ਆਪਣੇ ਆਪ ਨੂੰ ਸੋ ਜਾਵੇ ਕੀ ਵਰਗ ਬੰਦ है ਬਿਮਾਰ ਹੈ ਉਹ ਸਾਈਅਤ ਨੇ ਵੀ ਬਿਮਾਰ ਕੀਤਾ ਇਸਲਾਮ ਨੇ ਵੀ ਬਿਮਾਰ ਕੀਤਾ ਸਿੱਖੀ ਨੇ ਵੀ ਉਹਨਾਂ ਦੀ ਨੇ ਬਿਮਾਰ ਕੀਤਾ ਜਿਹਦਾ ਬਿਮਾਰ ਹੈ ਉਹਦੀ ਮਤਲੀ ਬਿਮਾਰ ਕੀਤਾ ਉਹ ਜਿਹੜੀ ਲਈ ਬੈਠਾ ਜਿਹੜੀ ਮਤ ਉਹਦੇ ਕੋਲ ਬਿਮਾਰ ਮਾਰੀਆਂ ਤੋਂ ਨਹੀਂ ਬੈਠੀ ਉਹ ਬਿਮਾਰੀਆਂ ਹੀ ਠੀਕ ਕਰਦੀਆਂ ਨੇ ਸਾਰੀ ਬਿਮਾਰੀਆਂ ਲਉਂਦੀਆਂ ਨੇ ਉਹ ਸਭ ਦਸਿਆ ਉਹਦੇ ਭਾਵੇਂ ਤਾਂ ਸਾਰੇ ਕੋਈ ਮਤ ਆਲੇ ਨੇ ਬਿਮਾਰ ਨੇ ਸਾਰੇ ਸਾਰੀਆਂ ਬਤਨ ਡਿਫੈਕਟੇ ਦੱਸੇ ਜਿਹੜੇ ਬਤਨ ਲਏ ਤੇ ਡਿਫੈਕਟ ਕੱਢੇ ਹੋਏ ਜਿਹੜੇ ਉਹ ਬਿਮਾਰਾਂ ਨੂੰ ਡੀਗ ਦਾ ਨਾ ਵੀ ਆ ਜਿਹੜੀ ਤੈਨੂੰ ਬਿਮਾਰੀ ਬੈਦਾ ਉਮੀਦ ਫਾਮ ਨੇ ਤਫਸੀਰ ਹੋਏ ਠੀਕ ਕਰ ਲੈ ਉਹਦੀ ਦਵਾਈ ਹੁਣ ਦੇਤੀ ਧਾਰੂ ਨਾਮ ਹੈ ਜਤੀ ਪਰ ਡਿਫੈਕਟੋ ਜਿੱਤੇ ਹੋਰ ਪੇ ਕਿਸੇ ਜਿਵੇਂ ਉਹ ਜਿਹੜੇ ਡਿਫੈਕਟ ਪਿਆ ਇਸਲਾਮ ਨੇ ਪਾਇਆ ਉਹ ਦੱਸਦਾ ਜੋਗੀ ਜਿਹੇ ਡਿਫੈਕਟ ਪਿਆ ਬੈਰਾ ਬਿਲਕੀ ਡਿਫੈਕਟ ਜਿਵੇਂ ਪਿਆ ਬੈਰਾ ਕੀ ਮੰਨਣ ਕਰੇਂਦਾ ਉਹਦੀ ਮੱਤ ਦੇ ਵਿੱਚ ਉਹ ਜਿਵੇਂ ਡਿਫੈਕਟ ਪਿਆ ਕੱਢਿਆ ਹੋਈ ਏ ਉਹ ਨੂੰ ਸਮਝਾ ਕੇ ਹੈ ਦਾ ਉਪਦੇਸ਼ ਤੇ ਉਹ ਤੱਕ ਹੈ ਆਪ ਕਹਤ ਸਮਝ ਆ ਗਈ ਗੱਡਣ ਦਾ ਫੈਕਟ ਉਹ ਡੋਇਦਾ ਹੈ ਨਾ ਉਹ ਤਾਂ ਸਮਝਾਓ ਸਮਝਣ ਸਮਝਾਉਣ ਲਈ ਗਲੇ ਉਹਨੇ ਕੋਰ ਮਾਰ ਕੇ ਪਾਵਾ ਭੁੱਲੇ ਮਾਰ ਕੇ ਪਾਏ ਨੇ ਅਸੱਚੇ ਭੁੱਲੇ ਹੋਏ ਨੇ ਰਾਹ ਸਾਰੇ ਹੀ ਬਿਮਾਰ ਨੇ ਬਿਮਾਰ ਨੇ ਰਾਹ ਭੁੱਲੇ ਨੇ ਰਾਹ ਬੋਲਦੇ ਨਹੀਂ ਸਿੱਧੇ ਰਾਹ ਕੋਈ ਹੈ ਹਾਂਜੀ ਤੋ ਸਭ ਤਰਸੀ ਉਹਦੇ ਵਾਸਤੇ ਸਾਰੀਆਂ ਮੱਤਾਂ ਕੋਈ ਨੂੰ ਕੋਈ ਨਹੀਂ ਫਰਕ ਪੈਂਦਾ ਉਹ ਆਪ ਜਿਸੇ ਮਤ ਆਪ ਜਿਹੜੀ ਮੱਤ ਦਾ ਧਾਰਨੀ ਆ ਉਹ ਉਹ ਸੱਚੀ ਮੱਤ ਦਾ ਕਰ ਸਿੱਖੀ ਸੱਚੀ ਮੱਤ ਦਾ ਨੂਰ ਬਾਕ ਅਜਿਹੇ ਸੋਗਾ ਅੱਜ ਸਿੱਖਾ ਉਹ ਸੱਚ ਤੇ ਹੀ ਖੜਾ ਹੋਰ ਉਹ ਤਲਵਾਰ ਸਾਜਦੇ ਤੇ ਸਿੱਕੀ ਕਰਦਾ ਸੱਚ ਦੇਖ ਸਾਡਾ ਮੁਕਾਬਲਾ ਕਰ ਉਹ ਤਲਵਾਰ ਤੇਰੀ ਕਰਦਾ ਕੋਈ ਫਾਇਦੇ ਬਰੋ ਦੇ ਕੜਾ ਕਿਉਂ ਮਾਇਆ ਝੂਠੀ ਹੈ ਭਾਇਰਾ ਜਿਹੜਾ ਸਾਡਾ ਬਰੋ ਚੂਗਾ ਜਿਹੜਾ ਅਜੇ ਮਾਇਆ ਤੇ ਡਿਪੈਂਡੈਂਟ ਹੈ ਮਾਇਆ ਦਾ ਅਸਟੇਟ ਰੱਖਦਾ ਹੈ ਮਾਇਆ ਦੀ ਚੀਜ਼ ਸਮਝਦਾ ਹੈ ਉਹ ਸਾਡਾ ਵਿਰੋਧ ਕਰੂਗਾ ਉਹ ਨਹੀਂ ਸਾਡਾ ਵਿਰੋਧ ਤੇ ਜਾ ਸਕਦਾ ਸਰਬ ਬੇਜੀਨ ਮਾਇਰ ਵਾਲਿਆ ਕਾਰਮ ਨੂੰ ਤਾਂ ਬਣਾ ਲਿਆ ਇਹਨਾਂ ਜਿਹੜੇ ਪ੍ਰਚਾਰ ਅਪਾ ਦਿਹਾੜੀ ਤੇ ਕਰਾਇਆ ਦਿਹਾੜੀ ਤੇ ਜਾਂਦਾ ਵੀ ਪੰਜ ਘੰਟੇ ਦੀ ਡਿਊਟੀ ਜਾਈਦੀ ਜੇ ਉਹ ਬੜੇ ਬਾਹਾਂ ਘਟੇ ਦਿਹਾੜੀ ਲਾਉਂਦਾ ਸੀ ਜਾਨੀ ਹੁਣ 8 ਘੰਟੇ ਲਾਉਂਦਾ 8 ਤੇ ਵੀ 7 ਘੰਟੇ ਕੰਮ ਕਰਦਾ 1.5 ਘੰਟੇ ਦਾ ਵੀ ਆ ਕੇ ਦਿਹਾੜੀ ਕੰਮ ਨਹੀਂ ਕਰਦਾ ਦਿਹਾੜੀ ਇਹਨੇ ਚਾਹੁੰਦੇ ਨੇ ਵੀ ਥੋੜੀ ਜੀ ਰਹਦਾ ਰਹੂ ਛੋੜੀ ਕਰ ਦੋ ਫਲਾਲੀ ਵਾਲੀ ਕੱਟ ਕਰ ਦੋ ਕਿ ਹੜੀਏ ਨੇ ਯਾੜੀਏ ਦਾ ਕੰਮ ਘੱਟ ਕਰਾਂ ਪੈ ਜਿਆਦਾ ਵੇ ਪੈ ਤੇ ਚਲੋ ਉਹਨੇ ਮਿਲਦੇ ਮਿਲਦੇ ਤੇ ਤਨਖਾਹ ਵਧਦੀ ਰਹੇ ਘਮ ਦਾਲ ਹੋੜ ਕਰਦਾ ਰਹੇ ਇਹ ਆਜ ਮੇਰੇ ਸਾਹ ਗੁਰੂ ਪ੍ਰਚਾਰ ਲੈ ਗਿਆ ਕਿ ਪ੍ਰਚਾਰ ਕਿਹਨੇ ਕੀਤਾ ਜਿਹਦੇ ਤਨਮਨ ਕੰਸਲ ਸਭ ਗੁਰੂ ਉਹਨਾਂ ਦੀ ਡਿਊਟੀ ਦਿਹਾੜੀ ਨਾਲ ਕਰਦਾ ਰਹੇ ਉਹਨਾਂ ਦਾ ਵਿਚਾਰਾਂ ਨੂੰ ਇਹ ਦਿੰਦੇ ਨੇ ਜੇ ਤੇ ਭਾਂਡ ਹੁੰਦੀ ਆ ਨਾ ਉਹ ਵੀ ਨਹੀਂ ਸਕਦੀ ਹੁੰਦੀ ਇਹਨੂੰ ਦਿੱਤਰ ਖਾਸ ਹੈ ਇਹਨਾਂ ਦੇ ਗਰਭ ਥੀ ਰੱਖੇਦੇ ਜੇ ਦੀ ਭਾਂਡ ਚੱਲਦੀ ਆ ਭਾਂਡ ਭਾਂਡ ਨਹੀਂ ਸਕਦੀ ਹੁੰਦੀ ਮੋਟੇ ਨੋਟੇ ਨਾਲ ਜੇ ਭਾ ਜਾਂਦੇ ਰਹਿੰਦੇ ਜਿਹੜੇ ਕਰਦੇ ਇੱਕ ਅੱਖੀ ਜਿਹੜੇ ਗਰਮਾਤੇ ਵੀ ਖੜੇ ਨੇ ਉਹ ਮੋਟੇ ਰੋਡੋ ਲੈਣੇ बहुत बड़ा ਅਪਰਾਧ हो ਰਿਹਾ ਹੈ ਇਹ ਅਪਰਾਧ ਦੀ ਸਜ਼ਾ ਬੜੂ ਵੀ ਬਹੁਤ ਤਕੜੀ ਜਦੋਂ ਦੱਤਾ ਕਰ ਰਹੇ ਨੇ ਜਿਹੜਾ ਤੁਹਾਨੂੰ ਕੀਤਾ ਨਾ ਸਾਬਤ ਕੀਤਾ ਲੋ ਉਹਦੇ ਬਾਅਦ ਜਾ ਕੇ ਡਿਫੈਕਟ ਪੈ ਗਿਆ ਤਾਂ ਪਾਸਨਾਥ ਨੇ ਵੱਡੇ ਜੀ ਨਾ ਫੜ ਕੇ ਉਹ ਕੋਈ ਲੁੱਕ ਹੀ ਬਚੇ ਤਾ ਜੱਗਾਂ ਹੋਈਆਂ ਨੇ ਉਹਨੇ ਕਿਤੇ ਨਹੀਂ ਛੋਕਾ ਅਪਰਾਧ ਤਾਂ ਵੀ ਆਦਮੀ ਕਰਦੇ ਉਸ ਕਰਮ ਤਾਂ ਹੁੰਦਾ ਜਿਹੜਾ ਅਪਰਾਧ ਹੈ ਕੋਦਰ ਤੋਂ ਦੇਖ ਲਓ ਪਰਮੇਸ਼ਰ ਉਹ ਦੇਖ ਲਓ ਉੱਥੇ ਤਾਂ ਨਹੀਂ ਹੋਈ ਰਹੂਗਾ ਸੰਤ ਉਬਾਰਣ ਹਾਂ ਕਰਮ ਸੰਤ ਉਬਾਰਣ ਦੁਸ਼ਰ ਸਭਨ ਕੋ ਬੂਰੂ ਕੋ ਉੱਥੇ ਨੀ ਉਹ ਹੈ ਧਰਮਕ ਜੇ ਮੇ ਚਲੂਗਾ ਸੰਤ ਕਿਵੇਂ ਉੱਤੇ ਆਉਣਗੇ ਦੁਸ਼ੀਆਂ ਦੀ ਜੜ ਕਿਵੇਂ ਪੱਟੀ ਜਾਊਗੀ ਇਹ ਸੱਚਖੰਡ ਦਾ ਹਮੇਸ਼ਾ ਯਰਾਦਾ ਰਹੇਗਾ ਹਰ ਰਹੂਗਾ ਇਹੀ ਰਹੂਗਾ ਇੱਛਾ ਸੱਚਖੰਡ ਦੀ ਇਹੀ ਰਹੂਗੀ ਉਹਦੀ ਇੱਛਾ ਦੇ ਸਾਹਮਣੇ ਇਹਨਾਂ ਦੀ ਇੱਛਾ ਕੀ ਕਰੂਗੀ ਇਹ ਦੱਸ ਦੇ ਜਦੋਂ ਕਰੋਪੀ ਹੁੰਦੀ ਹੈ ਪ੍ਰੋਪੀ ਵੀ ਜੇ ਨਾਲ ਪਤਾ ਲੱਗੇ ਗਿਆ ਚਲੋ ਉੱਥੇ ਗਏ ਮੁਤਾਸੰਨੀ ਆਉਣ ਪਾਸੇ ਚਾਉਂਦੇ ਇੱਥੇ ਪਤਾ ਲੱਗੇ ਗਿਆ 17 ਇੰਚ ਬਰਸਾ ਹੋ ਗਈ ਦਰਕਰ ਦੇ 17 ਇੰਚ 1.5 ਫੁੱਟ ਬਾਅਦ ਹੋ ਗਈ ਚਮਕੌਰ ਸਾਹਿਬ ਦੇ ਨਾਲ ਗੁੱਡ ਈਵਨ ਸਨ ਕਿੱਥੇ ਗਿਆ ਪਾਣੀ ਪਾਣੀ ਤਾਂ ਉੱਨੇ ਸੜਦਾ ਸਭ ਬੇਕਾਰ ਚਲਾ ਗਿਆ ਤੁਹਾਡੇ ਸਾਹਮਣੇ ਫਿਰਦਾ ਪਾਣੀ ਵੀ ਨਾਲ ਕਥਣਾਗੇ ਵੀ ਪਾਸਾ ਲਦਾ ਸੀ ਜਾਣਕਾਰੀ ਪਾਇਆ ਤੁਹਾਨੂੰ ਦਿਖਾਇਆ ਵੀ ਪਾਣੀ ਲੈਣਾ ਲੈ ਤੇ ਬਾਤ ਤੁਹਾਨੂੰ ਦੈਣਾ ਦੀ ਸਮਝਣਾ ਜਾਈਦਾ ਨਾ ਸੰਕੇਤ ਪਾ ਤੋ ਦੇ ਸੰਕੇਤ ਚ ਹੋ ਰਹੇ ਨੇ ਉਦੋਂ ਤੱਕ ਆ ਬਹੁਤ ਤਕੜੀ ਅਰੇ ਪਾਣੀ ਉਤੋਂ ਜ਼ਿਆਦਾ ਡੀਪੂ ਘੱਟ ਨਹੀਂ ਲੱਗਦਾ ਜਿੰਨਾ ਪਿੱਛੇ ਗਏ ਪਰ ਕੰਮ ਘਾਟਾਊਗਾ ਪਾਣੀ ਉਹਨੇ ਸਰ ਦਾ ਨਾਮ ਹੈ ਥੋੜੇ ਕੰਮਾਂ ਦੀ ਇਹਨਾਂ ਕੀ ਜਾਂ ਜੋ ਦੇਖੀਦਾ ਕੋਈ ਰੋਕੀ ਹੈ ਕਿ ਨਹੀਂ ਹੈ ਹਾਂਜੀ ਸੋਸ਼ੰਦਰ ਸੀ ਤਤ ਦਾ ਬੇਟਾ ਨਾਨਕ ਸਗਰ ਸ੍ਰਿਸ਼ਟੀ ਦਾ ਜਿਸ ਦਾ ਸੋਸ਼ੰਦਰ ਸੀ ਤਤ ਦਾ ਸਬਦਾਰਸੀਆ ਤਤ ਦਾ ਬੇਟਾ ਹੈ ਤਤ ਨੂੰ ਜਾਣਨ ਵਾਲਾ ਹੈ वाला है, ਸਮਝਣ ਵਾਲਾ ਹੈ ਤਤ ਦੇ ਗਿਆਨ ਦੀ ਗੱਲ ਕਰਨ ਵਾਲਾ ਹੈ ਸਬਦਾਰਸੀਆ ਤਤ ਦਾ ਬੇਟਾ ਹੈ ਤਤ ਦਾ है ਹੀ ਸਬਦਾਰਸੀ ਹੋ ਸਕਦਾ ਹੈ ਜਿਹੜਾ ਤਤ ਗਿਆਨ नहीं ਸਮਝਦਾ ਤਤ ਦੀ ਗੱਲ ਨਹੀਂ नहीं ਸਕਦਾ ਤਤ ਦਾ ਦਰਸ਼ਨ ਨਹੀਂ ਇਹਦੇ ਕੀਤਾ ਜਾਂ ਕਰਾਇਆ ਉਹ ਸਬਦਾਰਸੀ ਹੋ ਹੀ ਨਾਕ ਸਭ ਕੁਝ ਦਿੱਤਾ ਸਾਡੀ ਸ੍ਰਿਸ਼ਟੀ ਨੂੰ ਜਿੱਤ ਲੈਂਦਾ ਉਹ ਉਹਦੀ ਗੱਲ ਦਾ ਸਾਡੀ ਸ੍ਰਿਸ਼ਟੀ ਜਵਾਬੇ ਨਹੀਂ ਹੁੰਦਾ ਕੋਈ ਕਹਿੰਦਾ ਜਵਾਬ ਨਹੀਂ ਹੁੰਦਾ ਉਹਦੇ ਸੱਚੀ ਉਹਦੇ ਸੱਚ ਦਾ ਜਵਾਬੇ ਨਹੀਂ ਹੁੰਦਾ सगले ਸੱਚਾ ਜੇਤਾ ਹਾਂਜੀ ਜੀ ਜੰਤਰ ਲਿਖੀ ਹੈ ਸਾਡੀ ਸ੍ਰਿਸ਼ਟੀ ਮੰਦੀ ਹੈ ਇਹਦੇ ਮੁਕਾਬਲਾ ਦੀ ਕਿਤੇ ਸਾਨੂੰ ਸੇ ਸਦਾ ਬੜੇ ਬੜੇ ਖੋਜੀ ਉਹ ਲਈ ਬਠੇ ਹੱਥ ਦਸੋ ਹੰਦੀ ਕਿਉਂ ਇਹ ਕਰ ਸਕਦੇ ਲੋਕ ਸਾਡੀ ਦੁਨੀਆ ਹੈਰਾਨ ਹੈ ਵੀ ਕੀ ਹੈ ਗੁਰਬਾਣੀ ਕਿੱਥੋਂ ਆਈ ਹੈ ਕਿਵੇਂ ਦਿੱਖੀ ਕੋਣ ਆਦਿ ਵਿਸ਼ੇ ਅਦਿਭੁਤੀ ਤੇ ਮਹਿਰ ਉਹ ਕਰਦੀ ਸਭ ਤੇ ਨਹੀਂ ਹੁੰਦੀ ਤਾਂ ਭਾਵੇਂ